कि बाप आप अपना आप आप पैदा किया बेच अपना बाप आप ही बाप पा जेड़ा तू मेरा पिता मेरा माता किसे थर्ड पर्सन बारे नहीं है फर्स्ट पर्सन बारे सेकंड पर्सन थर्ड ਥਰਡ ਪਰਸਨ ਦੀ ਗੱਲ ਨਹੀਂ ਹੋਣੀ ਅਸੀਂ ਜਾਂ ਥਰਡ ਪਰਸਨ ਜਾ ਕੇ ਖੜਾ ਕਰ ਦਿੰਦੇ ਹਾਂ ਤਾਂ ਪਰਮੇਸ਼ਰ ਹੁੰਦਾ ਸਾਡੇ ਪਾਸੇ ਫਸਟ ਔਰ ਸੈਕੰਡ ਪਰਸਨ ਕੋਲ ਨੇ ਆਪਣਾ ਆਪ ਪੈਦਾ ਕੀਤਾ ਪਹਿਲਾਂ ਨਹੀਂ ਕੀਤਾ ਨਾ ਮਨੂ ਇਹ ਬੁੱਧੀ ਨੇ ਆਪਣਾ ਆਪ ਪੈਦਾ ਕੀਤਾ ਤੁਸੀਂ ਇਹ ਡਾਇਲੋਗ ਇੱਕ ਬੁੱਧੀ ਦਾ ਚਿੱਟਾ ਇੱਕ ਬੁੱਧੀ ਦਾ ਬਦ ਚਲੋ ਪੋਜ਼ੀਟਿਵ ਹੈ ਜਿੰਨਾ ਕੋ ਮਨ ਪੋਜ਼ੀਟਿਵ ਹੋ ਤਾਂ ਉਹ ਚਿੱਟਾ ਹੈ ਜਿੰਨਾ ਮਨ ਨੈਗੇਟਿਵ ਉਹ ਬਸ ਬਹੁਤ ਅੰਦਾਜ਼ ਹੈ ਮਨ ਦੇ ਦੋ ਪਹਿਲੂ ਨੇ ਮਨ ਰੂਪੀ ਸਿੱਕੇ ਦੇ ਦੋ ਪਹਿਲੂ ਨੇ ਇੱਕ ਪਾਸਾ ਵਾਇਰ ਨਾਲ ਜੁੜਿਆ ਹੋਇਆ ਉਸ ਰਿਜੁਰੇਪਸਾਂ ਸੱਚ ਬੋਲਦੇ ਮਾਇਆ ਨਾਲ ਜੁੜਿਆ ਹੈ ਤਾਂ ਮਾਇਆ ਦੀ ਭਾਈ ਉਹਨੂੰ ਧੁਖ ਮਾਇਆ ਦੀ ਪਿਆਸ ਮਾਇਆ ਦੀ ਲੋੜਾ ਸਰੀਰ ਦੀ ਇਹਦੀ ਜ਼ਿੰਮੇਵਾਰੀ ਹੈ ਚੇਤਨ ਬੁੱਧੀ ਕੋਈ ਛਾਵ ਜਰੂਰੀ ਗੱਲ ਪਾਣੀ ਦਾ ਸਰੀਰ ਨੂੰ ਤਾਂ ਪਤਾ ਲੱਗਣਾ ਧਿਆਨ ਕਿਨੇ ਰੱਖਣਾ ਜੀ ਦੇ ਦੇ ਨਾ ਜੀ ਦੇ ਜੀ ਤੇ ਕੋਲ ਜਿਹੜਾ ਵਰਤਦਾ ਸ਼ਰੀਰ ਨੂੰ ਧਿਆਨ ਰੱਖਦਾ ਸੱਚ ਉਹਦਾ ਤੇ ਹਰ ਹੈ ਜਿਹੜਾ ਸਤਿ ਧਿਆਨ ਰੱਖਣ ਵਾਲਾ ਸ਼ਰੀਰ ਦਾ ਉਹਨੂੰ ਵਸ ਧਿਆਨ ਮਨ ਵਸ ਆ ਗਿਆ ਨਾ ਧਿਆਨ ਉਹ ਜਿਹੜਾ ਧਿਆਨ ਰੱਖਣ ਵਾਲਾ ਸਭ ਤੋਂ ਵਿੱਚ ਸ਼ਰੀਰ ਦਾ ਉਹਦਾ ਨੋਮਾ ਦਾ ਬਣਵਾਇਆ ਨੇ ਫਾਦਰ ਧਿਆਨ ਤੁਝੋ ਧਿਆਨ ਜਿਹੜੇ ਕੰਮ ਆਈ ਹੈ ਸਿਰ ਹੁਣ ਬਣ ਕੋ ਕਰ ਅਸਲੀ ਕੰਮ ਤਾਂ ਉਹ ਬਾਹਰ ਕਰਨਾ ਦਰਿਆ ਦਰਿਆ ਬੜਾ ਚੜਿਆ ਹੋਇਆ ਬੜਾ ਤੇਜ਼ ਪਾਣੀ ਹੈ ਕਾਰਗੱਟ ਦਾ ਵੀ ਧਿਆਨ ਹੈ ਪਾਰ ਕਰਨਾ ਕਿਸ਼ਤੀ ਦਾ ਵੀ ਧਿਆਨ ਵੀ ਡੁੱਬ ਜਾਵੇ ਚਾਹ ਦੋਏ ਕਿਸ਼ਤੀ ਦਾ ਧਿਆਨ ਰੱਖਣਾ ਵੀ ਡੁੱਬ ਜਾਵੇ ਡਾਰਗੜ ਦਾ ਵੀ ਧਿਆਨ ਲੇ ਪਾਰ ਕਰਨਾ ਕੰਮ ਵਸਤ ਪਾਰ ਕਰਨਾ ਨਹੀਂ ਹੈ ਪਰ ਧਿਆਨ ਕਿਸ ਚੀਜ਼ ਉੱਪਰ ਗੁਰਮਤ ਕਹਿੰਦੀ ਹੈ ਕਿਸ਼ਤੀ ਦਾ ਧਿਆਨ ਵੀ ਰੱਖ ਇਹ ਧਿਆਨ ਨਹੀਂ ਰੱਖਣਾ ਕਿਸ਼ਤੀ ਨੂੰ ਪਾਰਤਾ ਕਰ ਲੋ ਹੀ ਨਹੀਂ ਇੱਧਰ ਦੇਖੋ ਕੁੱਤੀ ਕਰੀ ਜਾਣੇ ਕਰੀ ਜਾਣੇ ਤੇਲ ਲਈ ਜਾਣੇ ਵਰਦ ਕਰੀ ਜਾਣੀ ਹੈ ਕਿਸਤੀ ਦੀ ਉਹਨੂੰ ਸਜਾਈ ਜਾਣ ਬਟਣਾ ਜੀ ਜਦੋਂ ਕੰਮ ਵਾਸਤੇ ਲਾਉਣਾ ਵੀ ਪੈਂਦਾ ਜੀ ਤੇ ਇਹਦਾ ਉਹਨੂੰ ਇਹ ਧਿਆਨ ਫੱਟੇ ਪਹਿਲਾਂ ਮੋਟੇ ਲਾਲ ਹੋਇਆ ਜੋ ਵੀ ਕੁਝ ਕਰ ਲੋ ਨੂੰ ਬਰਤਲੇ ਲਗਾਤਾਰ ਰੋਜ਼ ਸਾਹ ਸਾਹ ਸਬਰ ਤਾਂ ਕਰ ਲਿਆ ਕੋ ਟਾਰਗੇਟ ਪਾਰ ਕਰਨਾ ਹੈ ਕਿਸਤੀ ਦੇ ਰੰਦੇ ਰੰਦੇ ਉਹ ਸਵਾ ਅਜਾਈ ਨਹੀਂ ਜਾਂਦੇਲ ਸਫਰ ਦਾ ਧਿਆਨ ਇਹ ਰੱਖਣਾ ਕਿ ਡੁੱਬੋ ਨਾ ਜਾਵੇ ਐ ਤਰੀਕੇ ਨਾਲ ਨਹੀਂ ਚਲਣੀ ਕਿ ਡੁੱਬਣਾ ਜਾਵੇ ਹੁਣ ਜੋਗੀ ਹੈ ਤਿਆਗ ਨੂੰ ਬਸਾਰਦਾ ਕਿਸਤੀ ਦਾ ਸਫਰ ਕਰਦਾ ਜੀ ਇਹ ਟਿੱਪੜੀਆਂ ਨੇ ਗੁਰਬਾਣੀ ਦੀ ਉਹਨਾਂ ਦੇ ਖਰਾਬ। ਇਹ ਆ ਤਾਂ ਧਿਆਨ ਰੱਖਿਆ ਹੀ ਨਹੀਂ ਕਿਸਤੀ ਦਾ। ਜੇ ਰੱਖਿਆ ਇੰਨਾ ਜ਼ਿਆਦਾ ਰੱਖਿਆ ਕਿ ਦੁਆ ਦੇ ਹਲ ਵਿਸਰ ਕੇ ਨੂੰ। ਦੂਜੇ ਪਾਰੇ ਰਣ ਕੇ ਬਣ ਜਾ ਰਹੇ ਮਿੱਤਰਾਂ। ਦੁਸਰ ਗਏ ਧਿਆਨ। ਦਾਂਕ ਤੱਕ ਸਰਗਰ ਟਾਰਗੇਟ ਤੱਕ ਨਿਸ਼ਾਨੇ ਤੋਂ ਧਿਆਨ ਦਿਓ ਜੁਜਾ ਪਹਿਲਾ ਸ਼ੇ ਜੁਜਾ ਖੇਡਣ ਤੇ ਧਿਆਨ ਕੇ ਲਾਗੇ ਜ ਖੇਡਣ ਜਤੇ ਅੰਕ ਲਾਗੇ ਇਨਸ਼ਾਅੱਲਾ ਬੇ ਆਪ ਕੀ ਪਹਿਲਾਂ ਤੇ ਬਚਪਨ ਨਾਲ 12 ਬਰਸ ਬਾਲਪਨ ਮਿੱਤੇ 20 ਬਰਸ ਕੱਚਾ ਬਣਦਾ ਚਾਲ ਬਸ 30 ਸਾਲ ਤੱਕ ਬਾਲਪੜਨ ਹੁੰਦੇ ਉਹਦਾ 2.5 ਦੇ ਨੂੰ ਕੰਡ ਲਾ ਦਿੰਦੇ ਨਾ ਥਰਡ ਪਰਸਨ ਥਰਡ ਪਰਸਨ ਬੱਕ ਜੇ ਥਰਡ ਪਰਸਨ ਹੈ ਵੀ ਹੈ ਸੰਸਾਰ ਚ ਉਹ ਸਿਰਫ ਦੱਸਦਾ ਦੱਸਦਾ ਕੁਛ ਕੁਝ ਨਹੀਂ ਦੱਸਦਾ ਤਦੋਂ ਕੋਈ ਕੁਛ ਨਹੀਂ ਥਰਡ ਪਰਸਨ ਦਾ ਸਿਰਫ ਦੱਸਣ ਦਾ ਦਸਰ ਹੈ ਜਿੱਥੇ ਤੁਹਾਨੂੰ ਪ੍ਰੋਬਲਮ ਹੋਦੀ ਹੈ ਸਮਝਾਉਣ ਦਾ ਰੱਖਦਾ ਹੈ ਉਹ ਬੱਕਰਾ ਸਾਡੇ ਸਾਡੇ નો ਬੱਕਰਾ ਦੋਏ ਫਸਟ ਆਫ ਸੈਕ ਹਸਪਤਾਲਸੰਭੂ ਸਰਗਨਸੰਭੂ ਦਾਸ ਤਾਂ ਜੀ ਨੂੰ ਪਿਤਾਵਾਦਾ ਕਹਿੰਦਾ ਕਿਹਨੂੰ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈਂ ਮੇਰਾ ਬੋਲਦਾ ਹਸਪਤਾਲ ਨੂੰ ਹਸਪਤਾਲ ਨੂੰ ਆਪਣੇ ਆਪ ਨੂੰ ਇਹ ਕਹਿੰਦੇ ਉਹ ਬਦਲ ਸਰਗਨਸੰਭੂ ਤਾਂ ਨਹੀਂ ਕਹਿੰਦਾ ਹਰੇ ਪੱਤੂ ਸੰਜੋਗ ਰਹੀ ਹੈ ਆਪਨ ਆਪ ਬਾਪ ਹੀ ਆਪਾ ਪਾਇਓ ਆਪ ਇੱਥੇ ਆ ਜਾਓ ਦੂਜੇ ਦਾ ਪੈਦਾ ਨਹੀਂ ਕੀਤਾ ਆਪੇ ਬਾਪ ਆਪ ਹੀ ਬਾਪ ਆਪੇ ਆਪਣਾ ਬਾਪ ਇਸ ਕਰਕੇ ਕਹਿੰਦੀ ਹੈ ਕੋਈ ਕਿਸੇ ਦਾ ਬਾਪ ਨਹੀਂ ਕੋਈ ਕਿਸੇ ਦੀ ਮਾਂ ਹਾਂ ਇੱਥੋਂ ਪਤਾ ਲੱਗੂਗਾ ਤੂੰ ਮੇਰਾ ਮਾਤਾ ਤੂੰ ਮੇਰਾ ਸੰਸਾਰੀ ਮਾਪੇ ਦੀ ਨਿਰਾਕਾਰੀ ਵੀ ਕੋਈ ਮਾਪੇ ਆਪਣੇ ਅੰਦਰ ਇੱਛਾ ਆਪੇ ਮੈਨੂੰ ਆ ਗਈ ਸੀ ਲੱਕੜ ਨੇ ਧੂਆ ਪੈਦਾ ਕੀਤਾ ਹੈ ਲੱਕੜ ਜਲੀਏ ਧੂਆ ਪੈਦਾ ਹੋਇਆ ਧੂਆ ਕੀ ਹੈ ਤੂਹਾ ਕੀ ਹੈ ਉਹ ਲੱਕੜ ਤੋਂ ਬਰਬਕੀ ਚੀਜ਼ ਹੈ ਕੋਈ ਲੱਕੜ ਦਾ ਹੀ ਆਪਣਾ ਲੱਕੜ ਖਤਮ ਹੋਈਏ ਧੂਆ ਬਣ ਗਿਆ ਲੱਕੜ ਖਤਮ ਹੋਈ ਹੈ ਜੋ ਲੱਕੜ ਤੁਖਦੀ ਹੈ ਖਤਮ ਹੁੰਦੀ ਹੈ ਤੂੰ ਪੈਦਾ ਹੋ ਜਾਂਦਾ ਦੂਹਾਂ ਤੇ ਜਲਦੀ ਕਰਾ ਦੇ ਦੋਆ ਕੋਈ ਵੱਖਰੀ ਚੀਜ਼ ਨਹੀਂ ਹੈ ਲੱਕੜ ਦੀ ਜੇ ਖੜੂ ਵੱਖਰਾ ਲੱਗਦਾ ਲੱਕੜੂ ਖੜੀ ਅੱਛਾ ਹੈ ਜੀ ਗੱਲ ਮਨ ਵੱਖਰਾ ਨਹੀਂ ਹੈ ਤਾਂ ਵੀ सरकार तो मैं नहीं कुछ नहीं कुछ आए तो हो रहा मैं तो कुछ ही नहीं मन की है वरगा ना मैं तेरी इच्छा थी द द तेरी इच्छा थी वे <laughs> तो कोबेरी इच्छा वेरी <laughs> इच्छा मैं तो हो गए इच्छा दा नो इबे ने ਇਕ ਚਾਹੇ ਦੀ ਹੈ। ਇੱਕ ਚਾਹ ਪਹਿਲਾਂ ਕੀ ਨਗੀਤੀ ਹੈ। ਆਪਣੇ ਉਧਰ ਆਵੇ ਛੱਪੇ ਦਾ ਕਰਦੇ ਹੋ। ਮੈਂ ਬਰਉਗੀ। 10 ਕਹਿਣ ਸੁਣਨ ਦੂਜਾ ਦੂਜਾ ਹੈ ਜੀ। ਕੋਈ ਇੱਛਾ ਜੀ ਮਾਰਨੀ ਹੈ। ਜਿਹੜੀ ਗਲਤ ਮਾਇਆ ਦੀ ਇੱਛਾ ਹੈ। ਇਹ ਕਹੇ ਤੈਨੂੰ ਜੇ ਪਾਇਆ ਬਿਗੂਚੀ ਹੈ ਗਲਤ ਹੈ ਸਜਮ ਕੀ ਅਮਚ ਇਹ ਜਿਹੜੀ ਦੂਜੀ ਭੁੱਖ ਪੈਦਾ ਹੋ ਗਈ ਨਾ ਮਾਇਆ ਦੀ ਮਾਇਆ ਦੀ ਭੁੱਖ ਮਾੜੀ ਹੈ ਮਾਇਆ ਦੀ ਲੋੜ ਗਲਤ ਨਹੀਂ ਸੀ ਲੋੜ ਹੋਰ ਚੀਜ਼ਾਂ ਕੋਲ ਦੀ ਲੋੜ ਅਨੁਸਾਰ ਖਾਈ ਦਾ ਲੋੜ ਨਹੀਂ ਹੈ ਲੋੜ ਲਿਮਟਿਡ ਹੈ ਭੁੱਖ ਲਿਮਟਿਡ ਹੈ ਉਕਰੀ ਲੰਗੜੋ ਓਕੇ ਬਖਣਾ ਤੋਤਾ ਦੇ ਲੋਕ ਲਿਮਟਡ ਨਹੀਂ ਹੈ ਉਹ ਅਨਲਿਮਟਡ ਹੈ ਲੋਡ ਲਿਫਟਡ ਲੋਡ ਦੌਰੋਟ ਕੀ ਉਹਦੀ ਬਸ ਤੀਜੀ ਬਲੀ ਨੂੰ ਉਹ ਨਹੀਂ ਕਰਦਾ ਉਹ ਲੋਡ ਹੈ ਸਰੀਰ ਦੀ ਲੋਡ ਹੈ ਸਰੀਰ ਦੀ ਭੁੱਖ ਨਹੀਂ ਸਰੀਰ ਦੀ ਲੋਡ ਨੂੰ ਸਰੀਰ ਦੀ ਭੁੱਖ ਬਣਾ ਲਿਆ ਸਰੀਰ ਦੀ ਭੁੱਖ ਨਹੀਂ ਵੜੀ ਆਪਣੀ ਭੁੱਖ ਵੜੀ ਸਰੀਰ ਦੀ ਲੋੜ ਆਤਮਾ ਦੀ ਖੋੜ ਜੋਗਾ ਕਰਦਾ ਹੈ। ਕਿ ਮੈਨੂੰ ਚੰਤਾ ਆਉਂਦੀ ਹੈ। ਇਹ ਤਾਂ ਰੋਜ਼ ਮੁਗੜਾ ਹੈ। ਇਹ ਤਾਂ ਹੁਣ ਮੌਤੋਂ ਕੋ ਖੁਬਰੀ ਹੈ। ਇਹ ਤਾਂ ਘੜੀ ਨੂੰ ਫੇਰ ਖੜੀ ਹੈ। ਮੌਤੋਂ ਕੋ ਖੁਬਰੀ ਤੱਕੜੀ ਨੂੰ ਫੇਰ ਖੜੀ ਆ ਉਹ ਕਹਿੰਦਾ ਇਹਦਾ ਇਕੱਠਾ ਸਟਾਕ ਜਮ ਕਰ ਲੀ। ਗੱਲ ਇਹ ਸੋਚਿਆ ਵੀ ਇਹਦਾ ਇਕੱਠਾ ਸਟਾਕ ਜਮ ਕਰ ਲੀ। ਕਿਹੜਾ ਖੜੀ ਖੜੀ ਉੱਠ ਕੇ ਮੇਰੇ ਵਾਸਤੇ। ਗੱਲ ਤਾਂ ਅਗਲ ਦੀ ਸੀ। ਪਰ ਇਹ ਵੀ ਲੋਡ ਅਨੁਸਾਰ ਰਹਿੰਦੀ ਫੇਰ ਠੀਕ ਸੀ। ਜਾਂ ਇਦੋਂ ਵੀ ਕਹਾਂ ਟੱਪ ਗਿਆ ਫੇਰ। ਫੇਰ ਉਹਦੋਂ ਵੀ ਕਹਾਂ ਟੱਪ ਗਿਆ। ਫਿਰ ਉਹ ਦੋ ਵੀ ਗਾਉਂ ਜੋ ਢੱਲੇ ਆ ਫਿਰ ਘਾਹੇ ਟੱਪਦਾ ਚੱਲਿਆ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਸ਼ਾਇਦ ਘਟੇ ਲੱਖ ਕੋਟ tava ਤਿਰਫ ਆਵੇ ਜਾਵੇ ਗਿਆ ਦੇ ਵਿੱਚ ਬੜਦੇ ਗਏ ਕਾਲਾ ਵਾਲੇ ਕੋਠੀ ਵਾਲੇ بڑے بڑے ਹੋਟਲਾਂ ਦੇ ਵਿੱਚ بڑے بڑے ਬੜੇ ਤੇ ਬੜੇ ਬੰਦੇ ਗਏ ਜਿਹੜੇ ਰਾਤ ਤੁਰਿਆ ਬਾਬੇ ਉਹ ਲੋਰ ਗਈ ਹੋਏ ਬੜਾ ਵਰਗਾ ਇਹੋ ਉਹ ਪਿੱਛੋ ਭੁੱਲੇ ਗਿਆ ਪਿੱਛੋ ਭੁੱਲੇ ਗਿਆ ਪਰ ਜਿਹੜਾ ਨਹੀਂ ਭੁੱਲਿਆ ਭੁੱਲਿਆ ਜੀ ਇਹ ਸਿਰਫ ਲੋੜ ਤੱਕ ਹੀ ਮਤਰੇ ਨੂੰ ਸੀ ਭੁੱਖਦੀ ਸੀ ਬੜੋਰੀ ਨਾਲ ਨਹੀਂ ਸੀ ਬੜੋਰਾ ਅਨਲਿमिटेड ਬਣ ਗਿਆ ਲਿਬਰਟੀ ਨਾਲ ਨਹੀਂ ਫਿਰ ਤਾਂ ਮੁੱਕ ਗਈ ਉਹਦੀ ਫਿਰ ਤਾਰੇ ਜਿਹੜਾ ਜੀ ਉਹ ਕਿਉਂ ਕੋਈ ਦਵਾਈ ਨਹੀਂ ਲੈਂਦਾ ਬੜੀ ਆਪ ਤਾਂ ਉਤਨ ਦੀ ਨਹੀਂ ਹੁੰਦੀ ਉਹ ਕਦਾ ਕੋਈ ਇਲਾਜ ਨਹੀਂ ਲੋੜਦਾ ਨਾਲ ਹੈਗਾ ਦੋ ਰੋਟੀਆਂ ਨਹੀਂ ਖਾਊਟ ਆਏ ਖਾ ਲੂ ਹਾਂ ਦੋ ਗਲਾਸ ਪਾਣੀ ਦੇ ਫਲਤੂ ਪੀ ਲੂ ਹਾਂ ਇਹ ਕਰੂ ਉਹ ਕਦਾ ਤਾਂ ਕੋਈ ਇਲਾਜ ਨਹੀਂ ਉਹ ਕਦਾ ਕੋਈ ਨਹੀਂ ਉਹ ਖਾ ਜਮਾ ਕਰ ਲੋੜ ਹੈ ਵਰਤ ਲੈਣਾ ਪਾਣੀ ਪਾਲ ਲੈ ਜਿੱਥੇ ਲੋੜ ਹੈ ਉੱਥੇ ਾਂਕੀ ਇਹ ਹੁਣ ਲੈ ਗਿਆ ਤੇਰ ਕਿੰਨਾ ਬੋਲੇ ਨਾ ਹਾਂਕੀ ਜੇ ਬੋਲੇ ਅਗਰ ਨਾ ਬੋਲੇ ਡੋੜਾ ਡੋੜੀ ਹੈ ਹੂੰ ਬੁੱਧਾ ਦਾ ਇਲਾਜ ਇਹ ਹੁਣ ਜਵਾਈ ਲੈ ਕੇ ਘਰ ਕਰ ਲਾ ਲੱਗ ਰੱਖਣ ਲੱਗ ਜੋ ਬੁੱਧਾ ਕੀ ਜਿਹੜਾ ਬਣ ਗਿਆ ਦਾ ਇਲਾਜ ਨਹੀਂ ਕੀਤਾ ਰਾਜ ਕਰਨ ਲੱਗੀ ਇਹ ਦਾ ਇਲਾਜ ਹੈ ਦੂਜਾ ਵਿਸਰਜਣ ਇਹ ਦਾ ਦੂਜਾ ਕੰਮ ਫਿਰ ਆ ਦੇ ਨਹੀਂ ਤਾਂ ਰੁਖਾ ਦੇ ਦੂਜੇ ਕੰਮ ਰਹਿ ਗਿਆ ਅਸਲੀ ਕੰਮ ਜਿਹੜੇ ਆਏ ਤੇ ਉਹ ਰਹਿ ਗਿਆ ਅਸਲੀ ਕੰਮ ਫਿਰ ਕਿਸ਼ਤੀ ਹੋਰ ਵਧਾਉਣ ਲੱਗੇ ਕਿਸ ਦਿਨ ਉਮਰੇ ਕਰ ਲੋ ਤੁਸੀਂ ਕਿਸ ਦਿਨ ਉਮਰ ਕਰਕੇ ਕੀ ਲੜ ਲੇ ਕਿਸ ਦਿਨ ਉਮਰ ਕਰਨ ਦਾ ਤਾਂ ਫਾਇਦਾ ਜੇ دریا ਦੀ ਸੈਰ ਕਰਨੀ ਹੋਵੇ ਪਾਰ ਜਾਣ ਲਈ ਤੋ ਕਦੇ ਵੀ ਮਨ ਸੰਸਾਰ ਚੋਂ ਕਹਿ ਰਹਾ ਜਦੋਂ ਇਹ ਇੱਛਾ ਪੈਦਾ ਹੋ ਗਈ ਤਾਂ ਸਰੀਰ ਦੇ ਅਮਰ ਹੋਣ ਦੀ ਇੱਛਾ ਪੈਦਾ ਹੋ ਗਈ ਤਾਂ ਫਿਰ ਭੁਗਤੀ ਦਾ ਤਾਂ ਖਿਆਲ ਵਿਚਰਿਆ ਜਾਏਗੀ ਹੰਦਰ ਤੇ ਆਂਦੇ ਨੇ ਤਾਂ ਫੜ ਲਿਆ ਅੰਗ ਲਵਾਏ ਉਹ ਦਿਨ ਉਹੋ ਤੇ ਜਿਹੜੇ ਬਾਹੂ ਬਸੇ ਕੀ ਕਮਜ਼ੋਰੀ ਹੈ ਬੰਦੇ ਦੀ ਜਿਹੜਾ ਖਿਆਲ ਉਹਨੇ ਪੈਦਾ ਦਿੱਤਾ ਨਵਾ ਅਸੀ ਉਹਨੂੰ ਵਾफा ਪੁਰਸ਼ ਕਹਿਤਾ ਉਹਦੇ ਅੰਦਰ ਦਾ ਕਮਲ ਉਹਦੇ ਸਾਤੋਂ ਵੀ ਗੜਕ ਗਿਆ ਉਹ ਤਾਂ ਮਾਇਆ ਜੰਨਾ ਜੀ ਲੱਗਿਆ ਛੱਡਣੀ ਨਹੀਂ ਖਿਲਦਾ ਉਹ ਤਾਂ ਫੱਕਾ ਹੀ ਹੋ ਗਿਆ ਉਹ ਤਾਂ ਜੇੜ ਦਾ ਦੋਸੀ ਹੋ ਗਿਆ ਉਹ ਤਾਂ ਸਰਦਾਰੀ ਚਾਹੁੰਦਾ ਸਰਦਾਰੀ ਮਿਲ ਗਈ ਉਹਨੂੰ ਜੇੜ ਦੇ ਅਜਿਹੜੇ ਸਰਦਾਰੀ ਬਣ ਗਈ ਪੂਜਾ ਹੁੰਦੀ ਹੈ ਉਹ ਕਹਿੰਦਾ ਇੱਥੋਂ ਦੇਖੋ ਛੱਡੋ ਪੂਜਾ ਤਾਂ ਹੁੰਦੀ ਹੈ ਵੇਰੀ ਮੈਂ ਤਾਂ ਜਟਾ ਕੇ ਲੈ ਜਾਂਦੇ ਨੇ ਹਰਖੜੀ ਲਾਉਣ ਵਾਲਾ ਨਾ ਕੋਈ ਸਾਰੇ ਬੱਥੇ ਟਿਕੜ ਵਾਲੇ ਹੋ ਕੋਈ ਚਾਹੁੰਦਾ ਵੀ ਹਰਖੜੀ ਲਾਉਣ ਵਾਲਾ ਕੋਈ ਆਵੇ ਸਲਾਹੂ ਕਰਨ ਵਾਲੇ ਤਾਂ ਸਾਰੇ ਜੁੰਦੇ ਨੇ ਹੁਣ ਜ਼िद ਕਰਦੀ ਇਹਦੀ ਜ਼िद ਕਰਦੀ ਇਹਦੀ ਆ ਭਾਵਨਾ ਸੀ ਜੋ ਕੀ ਅੰਦਰ ਇਹ ਭਾਵਨਾ ਉਹਨਾਂ ਲੋਕਾਂ ਦੇ ਅੰਦਰ ਹੈ ਜਿਹੜੇ ਕਹਿੰਦੇ ਨੇ ਸਰੀਰ ਲੰਬੀ ਉਮਰ ਕਰੀਏ ਜੇ ਇਹ ਭਾਵਨਾ ਨਹੀਂ ਤੁਸੀਂ ਦੱਸੋ ਹੋਰ ਕੀ ਭਾਵਨਾ ਹੋ ਸਕਦੀ ਹੈ ਹੋਰ ਕੀ ਇਚਾ ਹੋ ਸਕਦੀ ਹੈ ਉਹਨਾਂ ਦੇ ਕੋਈ ਹੋ ਸਕਦੀ ਹੈ ਕੋਈ ਨਜ਼ਰ ਨਹੀਂ ਆਉਂਦੀ ਕੋਈ ਨਜ਼ਰ ਨਹੀਂ ਆਉਂਦੀ ਕੋਈ ਇਚਾ ਜੇ ਜਿੱਥੇ ਤੇ ਜਗਾ ਭੇਜਤੀ ਹੋ ਜਾਏ ਜਿਹਦੀ ਵੀ ਉਹ ਕਹਦਾ ਚੱਕ ਲੈ ਰੱਬਾ ਹੁਣ ਛੇਤੀ ਵੀ ਪੁੱਛਦਾ ਲੈ ਕਹਿੰਦੇ ਸਾਰੇ ਜੇ ਗੁਰੂ ਦੇ ਚੇਲੇ ਗੁਰੂ ਨੂੰ ਕੈਦ ਕਰ ਲੈਣ ਵਾਸਤੇ ਉਹ ਵੀ ਕਹੇ ਵੀ ਹੁਣ ਚੱਕ ਲੈ ਖੜਾ ਜੜਾ ਉਹ ਰੰਗਦੇਵ ਨੇ ਆਪਣਾ ਬਾਪ ਕੈਦ ਕਰ ਲਿਆ ਫਿਰ 34 ਸੀ ਉਹ 34 ਸੀ ਸੇਜਾ ਲਈ ਉਹ ਕੜਾ ਹਟਾ ਕੇ ਲੈਣਾ ਜੀ ਪੁੱਤ ਹਰ ਕੋਈ ਇਹ ਹੀ ਕਹਿੰਦਾ ਕਿ ਜੋ ਦੇ ਜੀਵਨ ਨੂੰ ਤਾਂ ਬਹੁਤ ਚੰਗੀ ਹੈ ਹਰ ਕੋਈ ਚਾਹੁੰਦਾ ਕਦਾਂ ਜੀਵਨ ਕਿਨਾਂ ਲੋਕਾਂ ਨੇ ਇਹ ਧਰਮ ਇਹਨੂੰ ਧਰਮ ਮੰਨਿਆ ਕਿ ਇਹ ਧਰਮ ਥਾ ਇਸ ਵਿਸ਼ਲੇਸ਼ਣ ਨੂੰ ਵਿਚਾਰ ਕੇ ਹੀ ਗੁਰੂਕਨ ਨੇ ਇਹਨਾਂ ਤੇ ਅਟੈਕ ਕੀਤੇ ਨੇ 12 ਦੇ ਵਿੱਚ ਇਹਨਾਂ ਤੇ ਟਿੱਪਣੀ ਕੀਤੀ ਵੀ ਅੰਦਰ ਦਾ ਤੁਹਾਡੇ ਆ ਚੀਜ਼ ਇਹ ਤੋਂ ਸਾਬਤ ਹੁੰਦਾ ਥੋੜਾ ਜਿਹਾ ਧਿਆਨ ਨਾਲ ਦੇਖੀਏ ਸਾਰਿਆਂ ਦੇ ਅੰਦਰੋਂ ਦਾ ਪਤਾ ਲੱਗ ਜਾਂਦਾ ਇਦੋਂ ਕੰਨ ਨੇ ਘੱਟ ਘੱਟ ਕੇ ਅੰਦਰ ਕੀ ਜਾਂ ਉਹ ਦੇ ਉਹ ਕੋਈ ਇਹ ਅੰਦਰ ਦੀ ਗੱਲ ਜਾਣਨੀ ਬਹੁਤੀ ਔਖੀ ਨਹੀਂ ਹੈ ਕੋਈ ਬੋਲੀ ਕਰਾਵਾਤ ਨਹੀਂ ਹੈ ਉਹ ਬੁੱਤੀ ਦਾ ਹੈ ਕੀ ਕਰਾਵਾਤ ਮੈਨੂੰ ਦੱਸ ਪੜ੍ਹਤਾਲੇ ਨੇ ਪਿਛੜ ਲੈਂਦੇ ਚਿੱਤਰ ਮਾਰਦੇ ਨੇ ਉਹ ਘਾੜ ਲੈਂਦੇ ਅੰਦਰ ਦੀ ਉਹ ਗੱਲ ਬਾਹਲੇ ਹੁੰਦੇ ਨੇ ਅੱਛਾ ਫਿਰ ਇਹ ਮਤਲਬ ਸੀ ਤੇਰਾ ਜਾਂ ਦੋਨਾਂ ਬਿਆਨ ਹੰਦਲਿਓ ਕੱਲ ਦਾ ਹਾਂ ਬਰੇ ਮਤਲਬ ਜੀ ਤੇਰਾ ਉਹ ਗੱਲਾਂ ਨਾਲ ਗੱਲ ਜੋੜ ਕੇ ਸਾਰੀ ਕਹਾਣੀ ਪੂਰੀ ਕਰਦੇ ਉਹ ਤੋਂ ਹੀ ਕਹੀ ਜਾਂਦੇ ਨੇ ਵਿਆਹਾਂ ਜਿਹਦੇ ਤੇ ਫਰਕ ਹੁੰਦਾ ਸਾਰੀ ਗੱਲ ਜੋੜ ਹਾਂ ਜਿਹੜੇ ਹੁੰਦੇ ਨੇ ਮੂਰਖੰਦ ਕੋਰ ਉਹ ਵਿਆਹੇ ਉਹ ਥਾ ਟਿਕਣ ਸੀ ਬਦੂਰ ਨੂੰ ਪਤਾ ਹੀ ਨਹੀਂ ਬਾਕੀ ਆਪਨ ਆਪ ਹੀ ਬੰਦੇ ਉਹ ਨਾ ਬੰਦੇ ਆਪਨ ਆਪ ਆਪ ਹੀ ਉਪਾਇਓ ਆਪ ਹੀ ਬਾਪ ਦੇ ਲੈਵਲ ਤੇ ਕੋਈ ਮਾਤਾ ਪਿਤਾ ਨਹੀਂ ਨਾ ਸ਼ਰੀਰ ਦੇ ਲੈਵਲ ਤੇ ਕੋਈ ਮਾਤਾ ਪਿਤਾ ਜੇ ਮਾਤਾ ਪਿਤਾ ਕੋਈ ਹੁੰਦਾ ਜੋ ਦੇ ਲੈਵਲ ਤੇ ਤਾਂ ਸਾਰੇ ਬਰਾਬਰ ਨਹੀਂ ਹੋ ਸਕਦੇ ਸੱਚ ਖਣਚ ਸਾਰੇ ਬਰਾਬਰ ਕਿਵੇਂ ਹੋਗੇ ਕੋਈ ਮਾਤਾ ਪਿਤਾ ਹੋਵੇ ਕੋਈ ਦਾਦਾ ਬਾਬਾ ਵੀ ਹੋਵੇ ਉਦੇ ਜੇ ਤੁਸੀਂ ਕਹਿੰਦੇ ਅਸੀਂ ਪਰਮੇਸ਼ਰ ਨੂੰ ਮਾਤਾ ਪਿਤਾ ਕਹਿੰਦੇ ਰਹੇ ਹਾਂ ਮੰਨਦੇ ਰਹੇ ਉਹ ਤਾਂણો ਵੀ ਗਲਤ ਸੀ ਜੇ ਜਿਵੇਂ ਮੰਨਦੇ ਸੀ ਉਹ ਗਲਤ ਇਹਨੂੰ ਕਹਿੰਦੇ ਖੋਜੋ ਤ ਖੋਜੋ ਤ ਉਹ ਗੱਲਾਂ ਸਾਰੀਆਂ ਗਲਤ ਹੋ ਗਈਆਂ ਸਾਬ ਆਹੋਂ ਦੋ ਪ੍ਰੇ ਜੋ ਅਸੀਂ ਬੰਦੇ ਸੀ ਸਭ ਕੁਝ ਗਲਤ ਸੀ ਪ੍ਰਚਾਰ ਕਰਦੇ ਬੜੀ ਗਾ ਉਹਨਾਂ ਨੇ ਵੀ ਹੈ ਬੜੀ ਅਸੀਂ ਵੀ ਆਪਣਾ ਬਾਪ ਆਪਨੀ ਵਾਏ ਬਾਪ ਕਿਵੇਂ ਆਪਣਾ ਗਿਆਨ ਆਪਣਾ ਬਾਪ ਹੈ ਆਪਣੀ ਮਤ ਆਪਣੀ ਬਾਹ ਜੇ ਗਿਆਨ ਕੋ ਗਿਆਨ ਹੈ ਤਾਂ ਸੰਸਾਰ ਚ ਰੱਖੂਗਾ ਇੱਥੇ ਜੇ ਮਤ ਕੁਮਤਾ ਹੈ ਇਥੇ ਰੱਖੂਗੀ ਜਿੱਦਣ ਗਿਆਨ ਬਦਲਣਾ ਹੈ ਤਾਂ ਮਤ ਬਦਲਣਾ प्रदान की फेर पेदा किया की प्रक्रिया mm. मत दी प्रदान की नहीं है सुनना ज्ञान बनना गया उपजा सहज उपजा ज्ञान सहज मत ज्ञान उपजा ਉਪਲਿਅ ਅਸਰ ਦੇ ਗਿਆ ਐਸਾ ਗਿਆਨ ਉਹ ਜੀ ਜਿਹਦੇ ਨਾਲ ਟਕਾ ਆ ਗਿਆ ਮੱਤ ਜਾਗੇ ਉਹਨੇ ਮੱਤ ਜਾਗਦੇ ਤੇ ਮੱਤ ਦਾ ਬਾਜ ਚ ਮਾਤਾ ਦਾ ਬਾਜ ਚ ਤੇ ਤਾਂ ਬਿਲਕੁਲ ਤੋਂ ਮੇਰਾ ਪਿਤਾ ਉਹਦੇ ਮਾਤਾ ਪਹਿਲਾਂ ਪਿਤਾ ਬਾਜ ਚ ਜਨਮ ਮਾਤਾ ਤੋਂ ਹੁੰਦਾ ਇੱਥੇ ਪਿਤਾ ਤੋਂ हो गया ना सब कुछ साकल सब पर रोटी <coughs> उपजा सहज ज्ञान सुख प्राप्तस इस प्राप्तिया सहज ज्ञान में संतोष है सहज ज्ञान में ही ਤਦ ਤੋਹ ਕਿ ਤਾ ਵਾਤ ਬਾਤ ਕਰ ਸੰਤ ਮਤ ਜਦ ਬਦਲ ਨਹੀਂਏ ਪਹਿਲਾਂ ਤੁਹਾਨੂੰ ਗਿਆਨ ਮਿਲਣਾ ਤਾਂ ਮਤ ਛੱਡਣੀ ਆ ਤੁਸੀਂ ਤੁਹਾਨੂੰ ਬਦਲ ਗਿਆ ਯਾ ਤੇ ਬਣ ਕੇ ਵੀ ਜਾੜੂ ਉਹਦੀ ਕਮੀ ਪਹਿਲਾਂ ਤੁਹਾਨੂੰ ਦੱਸਣੀ ਉਸ ਵੇ ਲੋਕੀ ਕਹਿੰਦੇ ਸੀ ਦੂਜੀ ਦੀ ਖੂਬੀ ਉਹ ਵੀ ਗੱਲ ਨਹੀਂ ਤਸੀ ਉਹ ਕੁਮਤ ਦੁਰਮਤ ਦੀ ਜਗ੍ਹਾ ਤਾਂ ਗੁਰਮਤ ਨੇ ਲੈਣੀ ਦੁਰਮਤ ਨੇ ਮਰਨਾ ਹੈ ਉਹਦੀ ਜਗ੍ਹਾ ਗੁਰਮਤ ਨੇ ਪ੍ਰਗਟ ਹੋਣਾ ਇੱਕ ਮਰਨ ਤੇ ਦੋਬੂਏ ਦੋ ਮਰਨ ਤੇ ਜਵਾਬ 4 ਬਰਨਤੇ 6 ਬੂਏ ਚਾਰ ਪੁਰਖ 2 ਨਾਰਦਾ 2 ਔਰਤ ਵਰਦੀਆਂ ਪਹਿਲਾਂ ਔਰਤ ਵਰਦੀਆਂ ਕਹਿੰਦਾ ਬੁਰਾ ਨਮਰ ਬੁਰਾ ਦੀਵਾ ਬੜਾ ਤਾਂ ਹੋਰ ਬੁਰਾ ਨਮਰ ਜੇ ਬਾਰਾ ਮਾਰੀ ਬੁਰੇ ਪੈਦਾ ਕਰੀ ਜਾਊਗੀ ਮਾਰਨੀ ਕਿਨੇ ਸਭਾ ਨੇ ਮਾਰਨੀ ਗਾਲੇ गाने भरा नती एक मारनी है बुरी मारनी है पहली पैदादा जो सوره पे ये बुरी है वो मारनी आपकी सुंदर स्वरूप उस लखनी सहज ਦੁਰਮਤ ਮਾਰਨੀ ਹੈ ਸਭ ਤੋਂ ਪਹਿਲਾਂ ਜੇ ਦੁਰਮਤ ਨਹੀਂ ਮਰਦੀ ਕਿੱਡੀ ਕਹਾਦੀ ਜਾਂਦੀ ਦੁਰਮਤ ਨਹੀਂ ਮੰਨਣ ਦਿੰਦੀ ਦੁਰਮਤ ਕਿਨੇ ਮਾਰਨੀ ਗੁਰੂਤਨ ਗਿਆਨ ਨਾਲ ਮਤ ਬਦਲਨੀ ਹੈ ਜਾਂ ਮਰਨੀ ਹੈ ਗੱਲ ਕੋਈ ਹੈ ਤਿਆਗ ਦੇਣੀ ਹੈ ਤਾ ਪ੍ਰਵਾਹ ਖੰਡੂ ਕਰਦਣੋਂ ਮਤ ਦਾ ਜੀਏ ਮਤਹੀ ਛੱਡ ਦੇਣੀ ਏ ਉਹ ਤਿਆਗ ਦੇ ਪਹਿਲਾਂ ਕੀ त्याਗੀ ਏ ਪਹਿਲਾਂ ਨੇ ਘਰ ਕੀ ਨਾਲ त्याਗਾ ਇਹ ਪਹਿਲਾਂ ਹੰਨੇ ਘਰ ਕੀ त्याਗੀ ਹੋਈ ਜਿਹੜੀ ਅੰਤਰਾਧਵਾਦੀ ਆਵਾਜ਼ ਕਰ ਉਹ त्याਗੀ ਹੋਈ ਜਿਹੜੀ ਵਾਕ ਦੁਆਏ ਨੇ ਦਿੱਤੀ ਹੈ ਪਰਨ ਆ ਰਹੀ ਹੈ ਸਿਵ ਕਾਲਾ ਧੰਦਾ ਬੋਨੂ ਲੈ ਕੇ ਧੰਦੇ ਲੱਗਿਆ ਤੁਹਾਨੂੰ ਨੂੰ ਧੰਦਾ ਹੋਣਾ ਹੈ ਐਸਾ ਰਹੇ ਬੜੇ ਨਾਲ ਤਾਂ ਕੁਛ ਜੇ ਉਹ ਅਰਥ ਕਰੂ ਅਰਥ ਜਿਹੜੇ ਤੇ ਕਾਰਨ ਨੇ ਕੀਤੇ ਨੇ ਸਾਰੇ ਸਧੂ ਬੰਦੇ ਨੇ ਉਹਦਾ ਇਹਨਾਂ ਕਿਸ ਮੰਦੋਰ ਵਰਤ ਕੋਈ ਸਮਝ ਨਹੀਂ ਜੁੜਿਆ ਦਾ ਮੈਂ ਫੋਲ ਨਹੀਂ ਕਰਦਾ ਸਭ ਵਾਲੀ ਰਲ ਮਾਇਆ ਰਲ ਨਰੀ ਰਲ ਮਾਇਆ ਤੋਂ ਪਰੇ ਦੀ ਗੱਲ ਕੋਈ ਬੁੱਧੀ ਔਰ ਚਿੱਤ ਦੇ ਨਾਲ ਕੋਈ ਲੱਗਦੀ ਨਹੀਂ ਇਹ ਸਾਰੀ ਗੱਲੇ ਵਰ ਬੁੱਧੀ ਤਾਂ ਸਰੀਰ ਨਾਲ ਰਿਲੇਟਡ ਹੈ ਉਹਨਾਂ ਮਾਇਆ ਨਾਲ ਰਿਲੇਟਡ ਹੈ ਸਾਰੀ ਪੰਨਾਰੀ ਹੁੰਦੀ ਹੈ ਦੁਈਆ ਦੀ ਮਤ ਕਰ ਕੀ ਹੁੰਦੀ ਆ ਗੁਰ ਕੀ ਮਤ ਗੁਰ ਅੰਦਰ ਹੀ ਬੈਠਾ ਉਹ ਆਪਣੀ ਹੀ ਗੱਲ ਕਰ ਦਰ ਹੋਈ ਆ ਬੜੀ ਅੰਦਰ ਸਭ ਦੇ ਅੰਦਰ ਅੰਤਰ ਅਦਭੁਦੀਵਾਜ ਉਹ ਝੱਡੀ ਬੈਠਾ ਦੂਰ ਨਹੀਂ ਬਤਲੈਂ ਫਿਰਦਾ ਦੂਹੇ ਦੀ ਮਨਮਤ ਹੁੰਦੀ ਹੈ ਜੇ ਮਨਮਤ ਨਾ ਹੋਵੇ ਦੂਹੇ ਦੀ ਮਤ ਨਹੀਂ ਹੁੰਦੀ ਆ ਦੂਹੇ ਦੀ ਮਤ ਨਹੀਂ ਸਾਇਆ ਚਾਹੇ ਛੱਤੀ ਆ ਤਤਨਾ ਦੀ ਗੱਲ ਹੈ ਛੱਤੀ ਆ ਇਹ ਕਰਦੀ ਸਭ ਦੇ ਕਰਦੀ ਹੈ ਪਹਿ ਬਾਪ ਆਪ ਹੀ ਮਾਇਆ ਆਪ ਹੀ ਬਾਪ ਆਪ ਹੀ ਮਾਇਆ ਸਾਰਿਆਂ ਵਾਸਤੇ ਕਰ ਲੈਣਾ ਸਾਰਿਆਂ ਵਾਸਤੇ ਕਰ ਲੈਣਾ ਜੇ ਸਾਰਿਆਂ ਬਾਤੇ ਦੇ ਵੰਡਿਆ ਹੋਇਆ ਜਿਵੇਂ ਜਮਾਂ ਕੇ ਵਿਚੇ ਸਮਸਤ ਇੱਕ ਜੋਤ ਹੈ ਵਾੜ ਹੈ ਕਿਸੇ ਨੂੰ ਬਰਾਬਰ ਸੋ ਪਰ ਕਿਸੇ ਨੇ ਕਿਵੇਂ ਇਸਤੇਮਾਲ ਕਰਨ ਉਹ ਦੀ ਮਤੀ ਉਹਦਾ ਇਸਤੇਮਾਲ ਕਿਵੇਂ ਕਰਨ ਇਹ ਉਹਨੂੰ ਨਹੀਂ ਪਤਾ ਵੀ ਮੇਰੇ ਕੋਲ ਹੈ ਇਹ ਕਿਸੇ ਨੇ ਉਹਨੂੰ ਭਲੇਖੇ ਚ ਪਾ ਦਿੱਤਾ ਵੀ ਤੇਰੇ ਕੋਲ ਨਹੀਂ ਹੈ ਮੇਰੇ ਕੋਲ ਇਹ ਸਭ ਕੁਝ ਮੈਂ ਉਹ ਜੀ ਨੂੰ ਮੰਤਰ ਦਊਗਾ ਨਾਮ ਦੇ ਸਕਦਾ ਉਹ ਬਲੈਕਮੇਲ ਕੀਤਾ ਕਿਸੇ ਨੇ ਗੁਰਮਤ ਤੋਂ ਉਲਟ ਤਾਂ ਉਹ ਜਾਣੇ ਉਹ ਬਲੈਕਮੇਲ ਹੋ हो ਹੋ ਜਾਣ ਕਿ ਬਲੈਕਮੇਲ ਕਿਉਂ ਹੋ ਗਿਆ ਸਪਸ਼ਟ ਗੱਲ ਹੈ ਜ਼ਮੀਨ ਜਮ੍ਹਾਂ ਕੇ ਵਿਖੇ ਸਮਰਥ ਇੱਕ ਝੋਟ ਹੈ ਬਾੜ ਹੈ ਰਕਾਟ ਹੈ ਰਕਾਟ ਬਾੜ ਹੋਤਾ ਜਿੰਨੀ ਦਸੰਦੇ ਵਾਲੀ ਸਪਸ਼ਟ ਗੱਲ ਕਰਦੀ ਹੈ ਆਦੀ ਬਾਣੀ ਉਹ ਨਹੀਂ ਸਪਸ਼ਟ ਗੱਲ ਨਹੀਂ ਕਰਦੀ ਉਦੋਂ ਤੱਕ ਤਾਂ 200 ਸਾਲ ਤੇ ਜ਼ਿਆਦਾ ਸਾਨੂੰ ਵੀ ਇਹੀ ਗਿਆਨ 10 ਸਾਲ ਪਹਿਲਾਂ ਇਹਨੇ ਸੋਖੇ ਤਰੀਕੇ ਨਾਲ ਨਹੀਂ ਸਿਖਾਇਆ ਦਿੰਦੇ ਜਿੰਨੇ ਸੋਖੇ ਤਰੀਕੇ ਨਾਲ ਅੱਜ ਕਹਿ ਦਿੰਦੇ ਸਿਰਫ 10 ਸਾਲ ਚ ਤੋਥੇ ਸੀ ਕਹੇ ਜਿਹੜੇ ਜਾਣਦੇ ਸੀ ਸਮਝਾਉਣ ਵਾਲੇ ਉਸ ਦਿਨ ਜਮੂਲੂਗੜੇ ਆਵਰ ਸਾਨੂੰ ਬਾੜੇ ਦਾ ਜ਼ਰੂਰ ਮਿਲਿਆ ਫੁਰਬਾਨ ਸਮਝਾਉਣ ਵਾਲਾ ਨੀ ਮਿਲਿਆ ਆਪ ਕੋ ਜੰਦਾ ਵਿਸ਼ਾ ਹੋ ਗਿਆ ਅਕਰਾਜੋ ਹੋ ਜਾਂਦਾ ਜੀਹੋ ਜੋ ਕੋਈ ਆਦਮੀ ਐਕਸਪਰਟ ਬੁਣਦਾ ਜਾਂਦਾ ਕਿਸੇ ਚੀਜ਼ ਤੇ ਉਹ ਤੇ ਉਹਦਾ ਹੱਥ ਸਾਰਾ ਹੁੰਦਾ ਕਿਵੇਂ ਤੇ ਸਾਨੂੰ ਸਮਝਣ ਵਿੱਚ ਤੁਹਾਨੂੰ ਵੀ ਲੋਖੋ ਦੀ ਹੈ ਇਹੀ ਗੱਲ ਨਮਾ ਆਦਮੀ ਅੱਜ ਨਹੀਂ ਸਮਝ ਸਕਦਾ ਨਮਾ ਆਦਮੀ ਤੇ ਆ ਕੇ ਵੇਖਵੇਂ ਕਦੇ ਨਹੀਂ ਸਮਝ ਤੇ ਹੁੰਦੀ ਜੀ ਦਾ بیس ਬਣਿਆ ਹੋਇਆ ਜੀ ਪਤਾ ਹੈ ਉਹਦੇ ਇਸ ਨੂੰ ਚਾਉਂ ਕੋਲੋਂ ਉਹ ਦੁਆਰਾ ਜੋ ਸੰਕਰ ਹੈ ਨਾ 9.10 ਪਾਇਆ ਹੁਣ ਇਹਦਾ ਨਾ ਥੋੜਾ ਹੋ ਗਿਆ ਉਹ ਦੁਆਰਾ ਬੋਕੜ ਗੱਲ ਅਕਲ ਦਾ ਜਿਹੜਾ ਹੈ ਨਾ ਸਰਾਗ ਬਹੁਤ ਘੱਟ ਹੈ ਕਹਿੰਦੇ ਅੰਦਰ ਜਾਣ ਵਾਲੀ ਚੀਜ਼ ਥੋੜੀ ਹੋ ਜਾਂਦੀ ਹੈ ਅਕਲ ਦੀ ਵੱਧਦੀ ਹੋਈ ਨਹੀਂ ਗੱਲ ਕਹਿੰਦਾ ਖਾਣੇ 'ਚ ਵੱਧਦੀ ਹੋਈ ਨਹੀਂ ਗੱਲ ਮਰ ਉਹਦੇ ਖਾਣੇ ਵੱਡਾ ਹੋ ਉਹ ਕਹਿੰਦਾ ਇਹ ਤਾਂ 'ਚ ਨਹੀਂ ਵੱਧਦੀ ਗੱਲ ਅਕਲ ਦੇ ਖਾਣੇ 'ਚ आप ही सुखम आप ही अस्तुल आप पे है सुखम आप पे है अस्तुल आप ही सुखम आप ही अस्तुल लखी न जाए अस्तुल आए बढेगा अपने आप लखी न जाए ਅੰਦਰ ਜਿਹੜਾ ਸਾ ਲੈਂਦਾ ਸੁਖ ਆਪੇ ਗਏ ਇੱਕ ਕਰੀ ਜਦ ਦੋ ਰਹਿ ਕਹਿਣ ਸੌਣ ਤੋਂ ਦੂਜਾ ਆਪੇ ਕਹਿਣ ਵਾਲ ਇੱਕ ਹੋ ਗਿਆ ਇੱਕ ਹੋ ਗਿਆ ਉਹ ਆਪੇ ਕੇ ਕਹਾਂ ਤੇ ਜਾ ਜਾਈ ਜਾ ਕਹਾਂ ਤੇ ਜਾ ਜੀ ਜਾ ਦੋ ਦੋਨੇ ਰ ਇੱਕਾ ਦੇ ਸ਼ਰੀਰ ਨੂੰ ਪਾਇਆ ਹੋਇਆ ਇੱਕ ਹੱਥ ਬਾਰੀ ਨੂੰ ਪਾਇਆ ਹੋਇਆ ਜਿਵੇਂ ਆਪਾਂ ਚੱਲੋ ਕਿਸੇ ਦੂਜੇ ਬੰਦੇ ਨੂੰ ਚੱਕਣਾ ਹੋਵੇ ਬਸ ਹੱਥ ਰੋਨੇ ਇੱਕ ਕੋਈ ਆਦਮੀ ਨੇ ਪਾਇਆ ਹੋਇਆ ਇੱਕ ਕੋਈ ਆਦਮੀ ਦੇ ਦੋ ਹੱਥ ਨੇ ਬਾਹਰ ਚੱਤ ਇਹ ਕਾਤ ਜਿਹੜਾ ਸ਼ਰੀਰ ਫੜਿਆ ਹੈ ਇਕਾਤ ਸੁਖਬ ਦੇ ਨਾਲ ਜੁੜਿਆ ਸੁਖਬ ਅੱਜ ਤੁਸ ਆਪ ਇਲਕੀ ਜਾਏ ਨਾਨਕ ਲੀਲਾ ਲਖੀ ਨਾ ਜਾਈ ਨਾਨਕ ਲੀਲਾ ਉਹਦੀ ਲੀਲਾ ਸਾਰੀ ਤੇ ਆ ਲੀਲਾ ਇਹ ਸਮਝ ਨਹੀਂ ਆਉਂਦੀ ਇੱਕ ਦੀ ਲੀਲਾ ਬਾਲ ਮਰੇ ਭਲ ਲੀਲਾ ਬਾਲ ਮਰੇ ਬਾਰੇ ਕੀ ਜੀਲਾ ਪਾਲਸੀ ਜੀਲਾ ਚੋਕੀ ਕਰੋਗੇ ਆ ਬਾਲ ਤਾਂ ਮਰਦਾ ਮਾਨਾ ਆ ਲੀਲਾ ਵਾਲਖ ਦੀ ਆ ਇਹਦੀ ਦਾ ਨਹੀਂ ਛੱਡਦਾ ਇਹ ਲੀਲਾ ਰਾਸ ਲੀਲਾ ਜਿਹੜੀ ਹੈ ਨਾ ਇਹ ਲੀਲਾ ਹੀ ਲੈ ਕੇ ਮਰਦੀ ਹੈ ਕਹਾਲੇ ਇਹ ਜੈਨੂ ਪ੍ਰੇਸ਼ਨ ਲੀਲਾ ਕਹਿੰਦੇ ਨੇ ਮਾਲ ਮਰੇ ਬਾਲ ਕੀ ਲੀਲਾ ਬਾਲ ਕੀ ਲੀਲਾ ਬਾਲ ਕਾਲੀ ਲੀਲਾ ਨਹੀਂ ਛੜਦਾ ਸਿਆਣੇ ਦੂਰੋਂ ਖੇਲਦਾ ਹੱਥ ਨਹੀਂ ਲੋਂਦਾ ਕੁਸਮੜੇ ਨੂੰ ਹੱਥ ਜੜਦਾ ਨਹੀਂ ਉਹਦਾ ਇਹ ਅਗਰ ਅਗ ਨਾਲ ਖੇਲਦਾ ਉਹ ਖੇਲਦਾ ਨਹੀਂ ਦੂਰੋਂ ਦੇਖਦਾ ਯਾਨੀ ਉਹ ਰਾਈ ਜਾਂਦਾ ਫਿਰ ਕਹਿੰਦਾ ਦੇਖਣ ਆਇਆ ਜਗਤ ਮਾਈ ਉਹ ਤਾਂ ਤੁਮਸਾ ਦੇਖਦਾ ਇਹ ਤਾਂ ਤੁਮਸਾ ਕਰਦਾ ਤੁਮਸਾ ਕਰਦਾ ਨਾ ਸੁਣਨਾਰ ਬੁਣੀ ਜਾਨ ਸੁਣਨਾਰ ਬੁਣੀ ਜਾਨ ਉਹ ਤਾਂ ਕੋ ਕਬੀਰ ਮੂਝ ਬਿਆਹ ਚਲੇ ਪਰਖੇ ਕੌਤਕ ਆਏ ਕੌਤਕ ਸੁਰਨਰ ਆਏ ਸੁਰਨਰ ਮੁਰਜਨ ਸਾਰੇ ਕਰਨਾ ਆਏ ਨੇ ਕਬੀਰ ਕਰਨਾ ਆਏ ਨੇ ਇਹ ਕ੍ਰਿਸ਼ਨ ਲੀਲਾ ਆ ਕ੍ਰਿਸ਼ਨ ਲੀਲਾ ਹੈ ਸੋ ਨਾਮ ਹੈ ਹੈ ਦੇ ਦਾ ਰੀਣੀ ਹੈ ਲੀਲੇਗਾ ਬਾਲ ਮਾਰਾ ਬਾਲਕ ਕੀ ਲੀਲਾ ਇਹਦਾ ਵਰਨਾ ਜੇ ਆਪਣੀ ਲੀਲਾ ਜਿੰਨਾ ਚੱਲਿਆ ਤਾਂ ਹੀ ਵਰਦਾ ਜਿਹਦਾ ਜਮਣਾ ਬੰਨਾ ਕੀ ਲੀਲਾ ਦਾ ਕਹੀਏ ਹੋਰ ਚੀਜ਼ ਹੈ ਕ੍ਰਿਸ਼ਨ ਲੀਲਾ ਹੋਰ ਚੀਜ਼ ਬਾਲਕ ਕੀ ਲੀਲਾ ਕ੍ਰਿਸ਼ਨ ਲੀਲਾ RAM LILA RAM ਕੀ ਲੀਲਾ ਤਰਾਮ ਕੀ ਲੀਲਾ ਦਾ ਬਸ ਆਇਆ ਸਾਇ ਲੈਣਾ ਅਜਾ ਬਸ ਹਾਈ ਪਿਆਗੀ ਭਗਤੀ ਆ ਬਾਲ ਮਰੇ ਬਾਲਕ ਦੀ ਲੀਲਾ ਹੈ ਇਹ ਕਿੱਥੇ ਆ ਗਿਆ ਲੀਲਾ ਕਰਕੇ ਮਰਦਾ ਆਪਣੀ ਮਰਜ਼ੀ ਹੋਏ ਨ ਮਾਰਦੀ ਹੈ ਆਪਣੀ ਮਰਜ਼ੀ ਦੀ ਖੇਡ ਖੇਡਦਾ ਹਰ ਕਿਰਪਾ ਪ੍ਰਭ ਦੀਨ ਤੇ ਅੱਲਾ ਜਿਹੜਾ ਕ੍ਰਿਸ਼ਨ ਖੇਡਦਾ ਹੈ ਕ੍ਰਿਸ਼ਨ ਖੇਡਦਾ ਜਦ ਜਮਨਾ ਦੇ ਘਰਾਂ ਦੇ ਖੇਡਦਾ ਜਮ ਮਾਰ ਗਿਆ ਲਖੀ ਨਾ ਜਾਈ ਨਾਨਕ ਲੀਲਾ ਇਹ ਗੰਗਾ ਕਿਨਾਰੇ ਗੰਗਾ ਕਦਾਮੀ ਤਾਂ ਜਾਲ ਮਾਰਨੀ ਉਹਦਾ ਡੁੱਗੀ ਕਿ ਕਿਨਾਰੇ ਤੇ ਨਹੀਂ ਕੋਈ ਸੁਣਦਾ ਮੈਨੂੰ ਪਤਾ ਹੈ ਉੱਥੇ ਗੰਗਾ ਕੀ ਦੰਦ ਹੀਰਾ ਲਹਿਰ ਦਾ ਉਹ ਕਹਿੰਦੇ ਆਕਾਸ਼ ਮੇਂ ਆਨੇ ਲਹੰਗ ਦਰਿਆ ਗੁਸਲ ਕਰੂਗੇ ਉੱਥੇ ਗੁਸਲ ਕਰਨਾ ਬਹੁਤ ਵਿਚਪੜਨਾ ਬਹੁਤ ਕਹਿੰਦੇ ਜਿਵੇਂ ਇਹ ਤੋੜ ਨਹੀਂ ਨਾ ਗੁਸਲ ਕਰਨਾ ਨਹਾਉਣਾ ਤਾਂ ਫਿਰ ਵਿੱਚ ਬੜ ਕੇ ਹੀ ਹੋਊਗਾ ਸਾਨੂੰ ਕਿਨਾਰੇ ਤੇ ਜਾ ਕੇ ਰਹਿੰਦੇ ਵਿੱਚ ਆਪ ਹੀ ਸੋਖੋ ਆਪ ਹੀ ਅਸਤੂਲਾ ਆਪ ਹੈ ਸੋਖਰ ਮਾਪ ਹੈ ਅਸਥੀ ਲਖੀ ਨਾ ਜਾਈ ਨਾਨਕ ਲੀਲਾ ਕਹਿੰਦਾ ਇਹ ਲੀਲਾ ਹੀ ਨਹੀਂ ਸਮਝ ਆ ਰਹੀ ਏ ਦੀ ਨਾਨਕ ਕਹਿੰਦਾ ਤੇ ਬਾਲਕੀ ਸਾਰੀ ਲੀਲਾ ਐਸੇ ਕੱਢਣੀ ਏ ਆਪੇ ਹੀ ਇੱਕ ਦੋਥ ਹੋਇਆ ਗੱਲ ਇੱਕ ਦੀ ਚੱਲ ਰਹੀ ਏ ਉੱਥੇ ਉਹ ਉਸ ਦੀ ਗੱਲ ਹੈ ਜਿਹੜਾ ਇੱਕ ਸ੍ਰਿਸ਼ਟੀ ਵਿੱਚ ਦੋਥ ਹੋ ਰਿਹਾ ਹੈ ਜਿਹੜਾ ਸ੍ਰਿਸ਼ਟੀ ਤੋਂ ਬਾਹਰ ਇੱਕ ਹੈ ਉਹਦੀ ਗੱਲ ਨਹੀਂ ਹੈ ਇਹ ਕਹੋਦੇ ਵਾਸਤੇ ਨਹੀਂ ਕਿਉਂਕਿ ਸ੍ਰਿਸ਼ਟੀ ਤੋਂ ਬਾਹਰ ਵਾਲਾ ਜਿਹੜਾ ਇੱਕ ਹੈ ਉਹਦੇ ਨੂੰ ਨਿਰਵਰ ਨਿਰਪਾਲ ਲੱਗਣ ਦੀ ਲੋੜ ਨਹੀਂ ਹੈ ਭਾਵੇਂ ਉਹਦੇ ਹੁੰਦਾ ਹੀ ਨਹੀਂ ਭਾਏ ਤਾਂ ਇੱਥੇ ਇੱਥੇ ਜਿਹੜਾ ਨਿਰਭਉ ਹੈ ਨਿਰਵਰ ਅਕਾਲ ਮੂਰਤ ਮੂਰਤੀ ਹੈ ਦੇਵਤਾ ਦੀ ਮੂਰਤੀ ਹੋਣੀ ਕੋਈ ਇੱਕਾ ਜਿਹੜਾ ਉਹਦੀ ਪ੍ਰੋਪਰਟੀਆਂ ਮਾਇਆ ਦੇ ਵਿੱਚ ਨੇ ਜਿਹੜੀਆਂ ਉਹ ਦਸੀਆਂ ਮਾਇਆ ਜਿੱਕਾ ਜਾਂਦਾ ਫਿਰਦੇ ਵਾਰ ਨੇਰ ਪਾਵਾ ਕਾਲ ਮੂਰਤਾਂ ਜੁਨੀ ਹੈ ਸਵਾਹਿਬਾ ਬਖੇਰ ਵੀ ਹੈ ਜਲਵਾਜੀ ਮਹਾਰਾਜ ਦੇ ਹਤਰਾ ਫੇਰ ਬਣਿਆ ਹੋਇਆ ਅਭੀ ਤੋਂ ਰੋਸ ਤੋਂ ਤੱਕ ਮਿਲ ਕੇ ਆ ਜਾਂਦੇ ਕਿਹਾ ਸਵਾਹਿਬਾ ਹੈ ਨਹੀਂ ਆਪਣਾ ਆਪ ਆਪਰ ਕੀਤਾ ਅਸੀਂ ਕਰਤਾ ਪਰ ਪਰਮੇਸ਼ਰ ਨੂੰ ਮੰਨੀ ਬੈਠੇ ਤੇ ਗਲਤੀ ਕਰ ਦਿੱਤੀ ਅਸੀਂ ਆਪਣਾ ਆਪ ਆਪ ਪਾਇਆ ਅੱਜ ਤਾਂ ਆ ਅੱਜ ਤਾਂ ਸਾਰੀ ਗੱਲ ਕਲੀਅਰ ਹੋ ਪਹਿਲੇ ਹੀ ਆਪਣੇ ਮੰਡੀ ਬੈਠੇ ਆਪਾਂ ਕਿ ਕਿਸੇ ਇੱਕ ਜਿਹੜਾ ਹੈਗਾ ਮਾਇਆ ਦੇ ਵਿੱਚ ਜਿਹੜਾ ਇੱਕ ਉਹਦੀ ਗੱਲ ਹੈ ਕਿ ਇਕੱਲੇ ਤੇਨ ਤੇ ਲੋਕ ਤੇ ਬਾਹਰ ਦੀ ਗੱਲੇ ਜੋ ਗੱਲ ਸ਼ੁਰੂ ਕੀਤੀ ਤਿੰਨ ਲੋਕ ਦੀ ਗੱਲ ਮੈਂ ਲਿਖ ਸਕਦਾ ਅਖਰ ਚੌਥੇ ਲੋਕ ਦੀ ਗੱਲ ਅਖਰ ਤੋਂ ਬਾਹਰ ਚੌਥੇ ਲੋਕ ਦੀ ਜਿਹੜੀ ਗੱਲ ਆਈ ਵੀ ਮੈਸੇਜ ਵੀ ਆਇਆ ਉਹ ਵੀ ਅਖਰ ਤੋਂ ਬਾਹਰ ਤਿੰਨ ਲੋਕਾਂ ਦੀ ਹੈ ਤਿੰਨ ਲੋਕਾਂ ਦੀ ਹੈਗਾ ਇੱਕੇ ਤੋਂ ਹੋਏ ਭਾਈ ਤੋਂ ਤੋਂ ਹੁਣ ਕਿਉਂ ਕਿ ਮੈਂ ਦਾੜ ਕਿਨੂ ਕਿ ਜਿਹੜਾ ਇੱਕ ਨੂੰ ਕਿ ਇੱਕ ਹੋਏ ਤਾਂ ਹੁਕਮ ਹੈ ਇੱਕ ਹੋਏ ਤਾਂ ਆਤਮ ਜੀਨ ਪ੍ਰਾਤਮ ਜੀਨੋ ਮਤਲਬ ਇੱਕ ਨੂੰ ਖੋਜਣਾ ਤਾਂ ਚੋਂ ਮੰਨਦੇ ਖਣ ਮੰਨਦੇ ਵਿੱਚੋਂ ਉਹਨੂੰ ਦੇਖਣਾ ਆਤਮਾ ਜੋਤ ਜੋਤ ਮਹਿ ਜਾਤਾ ਦੋਏ ਜਾਤਮੇ ਜੋਤ ਸਰੀਰ ਤੋਂ ਬਾਹਰ ਜੋਤ ਬਣ ਰਿਹਾ ਜੋਤ ਦੇ ਵਿੱਚੋਂ ਜਾਂਦਾ ਹੋ ਜਾਂਦਾ ਹੋ ਗਿਆ ਨਾ ਸਾਬਤ ਖਜ਼ਾਨਾ ਹੀ ਖੋਲਦਾ ਸਭ ਉਹ ਲੰਘ ਗਿਆ ਨਾ ਤੇ ਖਜ਼ਾਨਾ ਆ ਜਾਣਾ ਵੀ ਉਹ ਇੱਕ ਹੈ ਨਹੀਂ ਉਹ ਨਹੀਂ ਕਹਿ ਸਕਦੇ ਸੀ ਬਤਾ ਅਨੇਕ ਕਦੇ ਨਹੀਂ ਕਦੇ ਕਿਰੇਬਾ ਕਦੇ ਕ ਇੱਕ ਨਹੀਂ ਆਇਆ ਹੋ ਇਤਨੇ ਉਹ ਗੋਤ ਇਤਨੇ ਹੈ ਉਹ ਨਹੀਂ ਕਹਿ ਸਕਦੇ ਹਰੇ ਉਹ ਕਿਰਤੀ ਤੋਂ ਪਰੇ ਇੱਕ ਤਾਂ ਗਿਣਤੀ ਦੇ ਵਿੱਚ ਜੇ ਗਿਣਤੀ ਤੋਂ ਪਰੇ ਕਹਿੰਦੇ ਇੱਕ ਨੂੰ ਗਿਣਤੀ ਦੇ ਪਰੇ ਕਿਵੇਂ ਕਹਦੇ ਨਾ ਤੂੰ ਜਦੋਂ ਉਹ ਗਣਤੀ ਤੋਂ ਭਰੇ ਗਏ ਨਾ ਫਿਰ ਕਿਵੇਂ ਗਏ ਤੋਂ ਭਰੇ ਗਏ ਗਣਤੀ ਦੇ ਪਰੇ ਕਿਵੇਂ ਗਏ ਤੋਂ ਭਰੇ ਕਿ ਸਾਰੇ ਹੁਣ ਆ ਜਾਣੇ ਨੇ ਇਕੱਠੇ ਹੋ ਪਰਚਲ ਸਾਰੇ ਖਲਾਫ ਖੜੇ ਹੋ ਜਾਣਗੇ ਸਾਰੀ ਥਿਊਰੀ ਚੇਂਜ ਹੋ ਗਈ ਸਾਰੀਆਂ ਮੱਤਾਂ ਹੀ ਖਤਮ ਹੋ ਗਈਆਂ ਇੱਥੇ ਜੋ ਧਾਰਨਾ ਇਹ ਮਿਲੀ ਹੋਈ ਹੈ ਨਾ ਸਾਨੂੰ ਜੋ ਅਸੀਂ ਮੰਨੀ ਬੈਠਿਆ ਇਹ ਹਿੰਦੂਵਾਦ ਦੀ ਧਾਰਨਾ ਸਿੱਖਵਾਦੀ ਧਾਰਨਾ ਨਹੀਂ ਸੀ ਸਿੱਖਵਾਦੀ ਧਾਰਨਾ ਉਹਦਾ ਹਿੰਦੂਵਾਦੀ ਧਾਰਨਾ ਪਰਮੇਸ਼ਰ ਨੇ ਨਹੀਂ ਕੀਤਾ ਉਹ ਹੈ ਕਿ ਉਹਦਾ ਹਿੰਦੂਵਾਦੀ ਧਾਰਨਾ ਇਹਦੇ ਉਹਦਾ ਸਵਾਲਾਂ ਨਹੀਂ ਹੱਲ ਹੁੰਦਾ ਦਾਣ ਤਾਂ ਕਹਿੰਦੇ ਨਹੀਂ ਦਾਣ ਕਿਥੋਂ ਉਹ ਤਾਂ ਬ੍ਰਹਮ ਨੂੰ ਆ ਪੂਰਾ ਬੰਦੇ ਨੇ ਕੋੜ ਬ੍ਰਮ ਆਰ ਬ੍ਰਮ ਪੂਰਾ ਸਤਪੁਰ ਅਧੂਰਾ ਸਤਪੁਰ ਉੱਥੇ ਤਾਂ ਬੰਦੇ ਹੀ ਨਹੀਂ ਗੁਰਪੂਰੇ ਪੂਰੇ ਗੁਰਕਾ ਸੂਬਾ ਦੇ ਇਹ ਗੱਲਾਂ ਉੱਤੇ ਪੂਰਾ ਹਜ਼ੂਰ ਉੱਤੇ ਇਹ ਗੱਲ ਹੀ ਹੁੰਦੀ ਉੱਤੇ ਤਾਂ ਹੁੰਦੀ ਤੇ ਸਾਰੇ ਪੂਰੇ ਸਭ ਕੋ ਪੂਰਾ ਆਪੇ ਹੋਵੇ ਘਟਣਾ ਕੋਈ ਹੁੰਦਾ ਉਹਦਾ ਕੋਈ ਕਹਿਦਾ ਨਹੀਂ ਘਟਾ ਸੰਤਾ ਕੋਈ ਕਹਿਦਾ ਘਟਾ ਤੇ ਨੌਂੰਦਾ ਹੀ ਹੋਵੇ ਕੱਪੜੇ ਬਰਸੇ ਦੂਜੇ ਨੂੰ ਹੋਵੇ ਬੇਦਾ ਪਿਛਲੇ ਕਈ ਜਨਮੋਂ ਤੋਂ ਇਵੇਂ ਹੀ ਹੈ ਨਾ ਕਹਿ ਰਹੇ ਜਣਦੇ ਪਿਛਲੇ ਕਈ ਜਨਮੋਂ ਦਾ ਤਾਂ ਮੈਨੂੰ ਗਿਆਨ ਚਲ ਜਾਇਆ ਰਹਿ ਗਿਆ ਜੇ ਹੋਰ ਥੋੜੀ ਦਾ ਕਈ ਜਨਮ ਕਹਿ ਦੂਗਾ ਜੋਗੀ ਨੇ ਕਹਤਾ ਤਾਂ ਵੀ ਪਿਛਲੇ ਜਨਮੋਂ ਤੋਂ ਤਪੱਸਿਆ ਕਰਦਾ ਸੀ ਬੈਣ ਲੱਗਿਆ ਸੀ ਪੱਥਰ ਤੇ ਬੈਠਾ ਸੀ ਇਕਬਾਲ ਜੋ ਕਹਿੰਦਾ ਤੂੰ ਮੇਰੇ ਨਾਲ ਬਸ ਕਹਿਣਾ ਕੀ ਚਾਹੁੰਦਾ ਸੌਰੇ ਜਬੇ ਇਕਬਾਲ ਸਨ ਦੇ ਕੇ ਕਿੰਤੂ ਪਰੰਤੂ ਕਰ ਕਰ ਕੇ ਗੱਲ ਨਹੀਂ ਕਰਨੀ ਬੇ ਚੁੱਪ ਕਰਕੇ ਬੇ ਗੱਲ ਚੈਹੀ ਕਹਿੰਦਾ ਤਰਿਆ ਕੀਤੀ ਸੀ ਅਸਲੀ ਤਨ ਚਾ ਇੰਤ੍ਰੇਗਾ ਨੀ ਦੀ ਬੰੜ ਨੇ ਔਰ ਕਿੱਥੇ ਕਰਨੀ ਸੀ ਔਰ ਕਿੱਥੇ ਕਰਨੀ ਸੀ ਜੋਗੀ ਬੰਦ ਹੁੰਦੇ ਨੇ ਔਰ ਕਿੱਥੇ ਕਰਤਾ ਜੋਗੀ ਦਾ ਸੀਗਾ ਹੀ ਉਹ ਹੁਣ ਬੜਿਆ ਸੀ ਤੇ ਪਿਛੇ ਕਰ ਦਿੱਤੀ ਔਰ ਕਿੱਥੇ ਕਰਨੀ ਸੀ ਇੱਕ ਅਦੋ ਉਹ ਕਲਸੀ ਕਿਥੇ ਬਾਹਰ ਉਹ ਪੜ੍ਹਨ ਜਾਉਂਦੇ ਨੇ ਕੈ ਤੋਂ ਉਹ ਤਾਂ ਸਿੱਖਦੇ ਉਹਦੇ ਵੇ ਯਾ ਯੂਰਦਾਂ ਗਿਮੇ ਜਾਂਦਾ ਉਹਦੇ ਸਿੱਖਦੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਕਰ ਕਰਪਾ ਨਹੀਂ ਹੁੰਦਾ ਕਰੀ ਕਰਪਾ ਕਰ ਕਰਪਾ ਤਾਂ ਉਹਨੂੰ ਕਹਾਂਗੇ ਕਰੀ ਕਰਪਾ ਕਰੀ ਕਰਪਾ ਪ੍ਰਭ ਦੀਨ ਦਿਆਲਾ ਕਰੀ ਕਰਪਾ ਪ੍ਰਭ ਦੀਨ ਦਿਆਲਾ ਯਾਦ ਪ੍ਰਭ ਦੀਨ ਦਿਆਲਾ ਨੇ ਕਿਰਪਾ ਕਰ ਦਿੱਤੀ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਥੇ ਜਿਹੜਾ ਮੇਰਾ ਮਨ ਹੈ ਤੇਰੇ ਸੰਤਨ ਸੰਤਨ ਕੀ ਮਾਹਰ ਵਾਲਾ ਵਾਲਾ ਤੇ ਫਤੂੜ ਲਾਉਗਾ ਅੱਗੇ ਤੂੰ ਊੜਾ ਹੁੰ ਜਿੱਥੇ ਰਾਰੇ ਨੂੰ ਸਿਹਾਰੀ ਐ ਉਹ ਪੋਜ਼ਿਟਿਵ ਐ ਤੂੰ ਊੜੀ ਤੇਰੇ ਜਨਮ ਰਾਰਣ ਜਰੀਏ ਜੇ ਤੇ ਰਾਰਾ ਮੁਕਤਾ ਹੋ ਤੇ ਆ ਤੂੜ ਤੋਏ ਓਂਗ ਅਗੇ ਨਹੀਂ ਤਾਂ ਹੁਣ ਪੜ ਲੈ ਆਉਦੇ ਨੇ ਨਾ ਕਰੀ ਕਿਰਪਾ ਪ੍ਰਭ ਦੀਨ ਦੇ ਅਲਾ ਤੇਰੇ ਸਰਦਨ ਕੀ ਮਨ ਹੋਏਰ ਵਾਲਾ ਨਿਰੰਕਾਰ ਆਪ ਨਿਰਗੁਣ ਸਰਗੁਣ ਏਕ ਚੱਲ ਪੜੀ ਭਿੰਨ ਭਿੰਨ ਤ੍ਰਹਿ ਗੋ ਹੈ ਗੁਰਮੁਖ ਓਮ ਰੂਪਾ ਆਕਾਰ ਨਹੀਂ ਹੈ ਬਦੋ ਗੁਰਮੁਖ ਬਤਾਓ ਜੋਤ ਹੈ ਜਾਤ ਹੈ ਬੋਲਦਾ ਨਹੀਂ ਹੈ ਇੱਛਾ ਗੁਰਮੁਖੀ ਗੁਰਮੁਖੀ ਇਹ ਜਦੋਂ ਗੁਰਮੁਖੀ ਗੁਰਮੁਖੀ ਗੁਰਮੁਖੀ ਗੁਰਮੁਖੀ ਹੈ ਕਿਓ ਆਕਾਰਾ ਉਹਨੇ ਜਿਹੜਾ ਆਕਾਰਾ ਦਿੱਤਾ ਉਹਨੇ ਜਦੋਂ ਆਕਾਰਾ ਕੀਤਾ ਸ਼ਬਦ ਪ੍ਰਗਟ ਕੀਤਾ ਪੈਦਾ ਕੀਤਾ ਫਿਰ ਸਤਗੁਰ ਦਾ ਜਨਮ ਸਰਦੂ ਕੋਲ ਉਹ ਖੰਦਰ ਉਪਰ ਗੱਲ ਕਰਦੇ ਨੇ ਬੁਤੀ ਬੁਤੀ ਦੇ ਤੋਂ ਹੱਥ ਮਿਦੋ ਦੋਏ ਪੱਠੇ ਕੀਤੀ ਬੁਤੀ ਦੇ ਵਿਚ ਪੈਦਾ ਹੋਇਆ ਯਾਨ ਸੁੱਤੀ ਜੋ ਪੈਦਾ ਹੈ ਇਸ ਕਰਕੇ नहीं ਲਿਖਵਾਇਆ ਗੁਰਮੁਖੀ ਆਇਆ ਗੁਰਮੁਖੀ ਲਿਖ ਜਾਈਊਗਾ ਗੁਰਮੁਖੀ ਨਹੀਂ ਆਉਣਾ ਲੱਗਦਾ ਉਹੜੇ ਤਰੀਕਾ ਉਹ ਬੁਰੀ ਕੀ ਤਰੀਕਾ ਹੈ ਅਲਪ ਸੁਖ ਛਾੜ ਹੁਣ ਅਲਪ ਸੁਖ ਛੜ ਤੇ ਬੁੱਧੀ ਜੀ ਅਲਪ ਸੁਖਾਂ ਦੀ ਮਗਰ ਨਹੀਂ ਭਜਦੀ ਅਗਲੇ ਪਾਈਦੀ ਜੀ ਸਾਡੀ ਅਲਪ ਸੁਖਾਂ ਦੀ ਅਲਪ ਸੁਖ ਛਾੜ ਬੜੀ ਬਾਰੇ ਰੌਲਾ ਪਾ ਕੇ ਕੀ ਕਰਦੇ ਹੋ ਵਿਚਾਰਾ ਤੇ ਬੱਲੇ ਕੀ ਹੈ ਪੱਤਾ ਬਰੀ ਰਹਿਣਾ ਵੇਰ ਦਾ ਇੱਕ ਪਾਸੇ ਐਸਾ ਹਣੂ ਰੌਣਾ ਪੱਤਾ ਬਰੀ ਰਹਿ ਰਹੇ ਹੈ ਜੇ ਨਾ ਪੱਤਾ ਬਰੀ ਰਹਿਣਾ ਇੱਕ ਫਲਦਾ ਤੇ ਰਹਿਣਾ ਫਲਦਾ ਨਾ ਹੈ ਪੱਤੇ ਹੀ ਨੇ ਹੱਲੇ ਹੁੰਦਾ ਇਹਨਾਂ ਦੇ ਹਾਂ ਕੰਡੇ ਜਰੂਰ ਲੱਗਣਗੇ ਜਾਂ ਝੜ ਗਏ ਨੇ ਪੱਤੇ ਵੇਰੀ ਵਾਲੇ ਕੰਡੇ ਜੂੜਦੇ ਕੋਈ ਸਾਰੇ ਸਾਰੇ ਉਹ ਦਿਖਣ ਹੋਈ ਜਦ ਇੱਕ ਪੰਡਨ ਦੇ ਕੰਡੇ ਦੇ ਹੁੰਦੇ ਸੀ ਦਿਖਾਦੇ ਤੇ ਰਮਦਾਸ ਨੇ ਪਤਾ ਇੱਥੇ ਛੱਡੇ ਆਲੀ ਕੋਈ ਸਾਡੇ ਇੱਥੇ ਬਸ ਹੱਥ ਜੋੜ ਕੇ ਵੀ ਆ ਕੰਡੇ ਜਿਹੜੇ ਆਏ ਗਾ ਇਹ ਹੁਣ ਕਿਰਪਾ ਕਰ ਕੰਡੇ ਕੰਡਿਆਂ ਨਾਲੇ ਪਗ ਲਾਈ ਦੀ ਵੇਰੀ ਦਾ ਕੱਡਾ ਪਕ ਨਹੀਂ ਲਾ ਲੈਂਦਾ ਇਹ ਲੋਦੀਆਂ ਔਰਤਾਂ ਲੈਂਦੇ ਸੀ ਪਕ ਨਹੀਂ ਸੀ ਲਾਉਂਦੇ ਸੜੇ ਸ਼ਿਕਾਰ ਜਦੋਂ ਚੈਪਟਰ ਖੋਲਿਆ ਫਿਰ ਹੱਥ ਬੰਨ ਦਾ ਵਗੀ ਠੀਕ ਦਿਖਾਤੇ ਬੁੱਢਵੇਂ ਲਾ ਲੰਦ ਨੇ ਕੱਡੇ ਕਾਇਦਾ ਵੇਰੀ ਨਹੀਂ ਕਹਦੇ ਦੜੂਰੇ ਕਾਜ ਰੱਖੀ ਦੀ ਠੀਕ ਅਬਦਾਇਆ ਨਹੀਂ ਹੈਗਾ ਸੱਚ ਕਿਹਾ ਸੀ ਉਹਨੇ ਸੀਗਾ ਵੀ ਆਲੀ ਓਂਗ ਨਰੰਕਾਰ ਓਂਗ ਗੁਰਮੁਖੀ ਕਿਉ ਅਗਾਰਾ ਗੁਰਮੁਖੀ ਲਗਦਾ ਆਇਆ ਹੈ ਇਹ ਪੰਡਤਾਂ ਤੋਂ ਵਰਗੇ ਵਿਦਵਾਨ ਨੇ ਕੋਈ ਫੱਕ ਨਹੀਂ ਇਹਨਾਂ ਚਰ ਉਹਨਾਂ ਪੰਡਤਾਂ ਚ